जप आप प्रभु तहन लोए युग युग दाता अवर न कोई जप आप प्रभु तहन लोए जदों आप प्रभु तेरा लोका में है ऐसा प्रभु दा जर दर्शन हो जांदा है साधु आ जांदी है युग युग दाता अवर न कोई ਯੋਗ ਜੁਗ ਦਾ ਦਾਤਾ ਵੀ ਹੋਰ ਕੋਈ ਨਹੀਂ ਹੈ ਦਾਤਾ ਇੱਕੋ ਹੀ ਹੈ ਠੀਕ ਹੈ ਕੋ ਉਗਤਾ ਜੀ ਉਹ ਦਾਤਾ ਸੀ ਹੂੰ ਹੂੰ ਜਿੱਦਾਂ ਲੋਕਾਂ ਆਪਣੇ ਆਪ ਨੂੰ ਇਹ ਗੱਲ ਯਾਦ ਜਾਂਦੀ ਸਮਝ ਆ ਜਾਂਦੀ ਹਾਂ ਆਪਣੀ ਗੱਲ ਸਮਝ ਆਉਂਦੀ ਆਪਣੇ ਆਪ ਨੂੰ ਠੀਕ ਹੈ ਜੀ ਯੋ ਪਾਵੈ ਤਿਉ ਰਾਖੈ ਰਾਖ ਜਸ ਜਾਚੋ ਦੇਵੈ ਪਤਸਾਖ ਯੋ ਪਾਵੈ ਤੋ ਰਖੋ ਰਾ ਫੇਰ ਕਹਿੰਦੇ ਵੀ ਜਿਵੇਂ ਜਿੱਭਾ ਲੱਗੇ ਉੱਥੇ ਉਵੇਂ ਰਖ ਰਾਖ ਜਸ ਜਾਚੋ ਜਸ ਜਾਚੋ ਜੱਟ ਹਾਂਜੀ ਦੇਵੈ ਪਤਸਾਖ ਦੇਵੈ ਪਤਸਾਖ ਬਾਜ ਅਜਮਤਾਂ ਸਰਬ ਤੇਰਾ ਅੱਛਾ ਜੀ ਹੋਰ ਕੋខਾ ਦੁੱਧਾ ਜਰੂਰ ਲਾ ਕੇ ਤੋਕ ਸੋ ਕੁਝ ਜਿਲੇ ਲੱਖ ਹੂੰ ਹੂੰ ਜਾ ਜੇਦੇ ਪੱਤਾ ਫੁੱਟੇ ਮੇਰੀ ਸ਼ਾਦ ਤੁਰੇ ਤੁਰ ਫੜ ਲੇ ਰਵੀ ਜਾਗ ਫੁੱਟੂ ਬਲਤਾਂ ਲਗਣ ਪਹਿਲਾ ਪੱਤਾ ਫੁੱਟਣ ਦੇ ਸ਼ਾਦ ਤੁਰ ਜੀ ਤੇ ਫੁੱਲ ਲਗਣੇ ਤੇ ਫੜ ਲੇ ਤੜ ਹੂੰ ਉਹ ਕਹਿੰਦੇ ਪਾਈ अच्छा ये पत्ता तुम्हें थे पता करांगे जी यार पता है साधारण पता है हम्म हम्म साधारण पत्ता होता है हां जी सागते फूल लगण सागते फाळ लगण हम्म हम्म क्या फाळ मेले ਤਾਂ ਤੁਜੇ ਸਮਾਵਾ ਇਹ ਜਾਗ ਜਮਾ ਜੰਗਰਤ ਅਵਸਥਾ ਜੋ ਗਈ ਜਮ ਬੇਸਰੀ ਕੇ ਨਾਲ ਫਿਰ ਵੀ ਜਾਗਦਾ ਆਪਣੀ ਤਾਕਤ ਤੇ ਜਾਗਦਾ ਹੀ ਰਹੋ ਜਾਗ ਤੇ ਜਾਗਰਣ ਜਾਗ ਰਹਿਣ ਤੋਂ ਭਾਵ ਫਿਰ ਵੀ ਜੇ ਕੇਸ ਤੇ ਸੱਚਦਾ ਹੀ ਬਣਨਾ ਰਹੇ ਤੇਸ ਬਦਲ ਨਹੀਂ ਆਵੇ ਬੂਦਾ ਰਾdre ਚਰਨਾਂ ਤੇ ਆਵੇ ਕਾਲੀ ਜਾਗਦਾ ਰਹੇ ਕਰਦਾ ਜੇਦ ਗਿਆ ਫਿਰ ਵੀ ਗੜਜੂ ਗੱਲ ਜਾਗ ਤੇ ਜਾਗ ਜਾਗ ਰਹਾ ਤੁੱਤ ਭਾਵਾਂ ਸੱਤੇ ਚੰਦਾ ਲੱਗਦਾ ਰਹੇ ਸੱਤੇ ਮਿਠਾ ਲੱਗਦਾ ਰਹੇ ਠੀਕ ਹੈ ਜਾ ਤੂੰ ਮੇਲੇ ਤਾਂ ਤੁਝੇ ਸਮਾਵਾਂ ਜਾਂ ਤੂੰ ਬੇਲੇ ਤਾਂ ਤੁਝੇ ਸਮੋਣਾ ਜਾਂ ਠੀਕ ਹੈ ਜੈ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲਿਆ 20 21 ਜੈ ਜੈਕਾਰ ਜਪੋ ਜਗਦੀਸ਼ ਜੋ ਜਗਰ ਦਾ ਬਾਲਕ ਅੱਲ ਦੀ ਜੈ ਜੈਕਾਰ ਜਪਣੀ ਚਾਹੀਦੀ ਹੈ ਹਮਮ ਜਗਰ ਦਾ ਸੌਂਦੀ ਈਸ਼ ਹੈ ਉਹਦੀ ਜੈ ਜੈਕਾਰ ਜਪਣੀ ਚਾਹੀਦੀ ਹੈ ਕੱਲ ਦੀ ਚਾਹੀਦੀ ਹੈ ਹਾਂ ਹਾਂ ਗੁਰੂ ਗੁਰਮੁਖੀ ਮਿਲਿਆ 20 21 21 ਕੁਰਮਕ ਬਲੀਆ 20 20 ਦਾ ਪੂਰਾ ਪੂਰਾ ਗੁਲ ਗਿਆ ਇਹ ਨਹੀਂ ਥੋੜਾ ਜਿਹਾ ਗੁਲ ਗਿਆ ਥੋੜਾ ਜਿਹਾ ਇਹਦੇ ਨਾਲ ਇੱਕ 21 ਨਾਲ ਤੇ 21 ਨਾਲ 100 ਦੀ ਸੜੀ ਮਿਲ ਗਿਆ ਅੱਛਾ ਜੀ ਸੌਫੀ ਸੜੀ ਸਮਾ ਗਿਆ ਨਾਲ ਅੱਛਾ ਜੀ 20 আর 21 ਨਹੀਂ ਤਾ ਦਾ ਮਤਲਬ ਹੈ 100% ਤੇ ਇੱਕ ਵਿੱਚ 100% ਰਸਮਾ ਗਿਆ ਹੈ ਜੀ ਹਾਂ ਉਹ ਵੀ ਇੱਕ ਵਿੱਚ ਪੂਰੇ ਦਾ ਪੂਰਾ ਇਸ ਵਿੱਚ ਆ ਗਿਆ ਠੀਕ ਹੈ ਜੀ ਪੂਰੇ ਦਾ ਪੂਰਾ ਸਮਾ ਗਿਆ ਆਪਾਂ ਪੜਿਆ ਸੀ ਜੈ ਜੈਕਾਰ ਜਪੋ ਜਗਦੀਸ਼ ਦਾ ਕੀ ਭਾਵ ਬਣਦਾ ਜੀ ਜਪੋ ਦਾ ਮਤਲਬ ਬੋਲਣਾ ਸਮਝਣਾ ਸਭ ਜਿਹੜਾ ਨੀਕਾ ਸਭ ਜਿਹੜਾ ਉਹ ਬੋਲਣ ਰੂਹੀ ਹੈ ਬੋਲੇ ਆਪੇ ਜਾਣ ਸਮਝੇ ਤੇ ਠੀਕ ਹੈ